शलोक मोहल्ला दूजा अंधे कह रा दस्सी है अंधा होई सु जाए होए सुजाखा नानका सो क्यों उजड़ पाए समझदार ज्ञानवान जिनी रास्ते तुरदे हुंदे ने ने राह ने, रा ने उजड़ पा दंदे ਜਿਹੜਾ ਸਜਾਖਾ ਅੱਖਾਂ ਵਾਲਾ ਸਮਝਦਾਰ ਹੈ ਬੁੱਧਵਾਨ ਆਦਮੀ ਨੇ ਸਜਾਖਾ ਆਦਮੀ ਜਿਹੜਾ ਹੈ ਅੱਖਾਂ ਵਾਲਾ ਸਮਝਦਾਰ ਵਾਲਾ ਤੇ ਉਹ ਇੱਕ ਬੁੱਧੀ ਹੈ ਮਨਮਤਾ ਸਾਰੀਆਂ ਉਜੜ ਕੌਣ ਰਣੀਆਂ ਨੇ ਐ ਸੰਤ ਸਾਰੇ ਉਜੜ ਪਏ ਹੋਏ ਨੇ ਉਜੜ 파 ਰਹੇ ਨੇ ਇੱਥਾਂ ਬੰਦੇ ਨੇ ਉਹ ਨਹੀਂ ਸੰਤਾਂ ਦੀ ਮਗਨ ਲੱਗਦੇ ਜਿਹੜੇ ਗੁਰਮੁਖ ਨੇ ਗੁਰਬਾਣੀ ਸਮਝਿਆ ਜਿਨ੍ਹਾਂ ਨੂੰ ਹੋਰ ਨਹੀਂ ਲੱਗ ਸਕਦੇ ਇਹਨਾਂ ਦੀ ਗੱਲ ਦਾ ਇਹ ਮਤਲਬ ਹੈ ਕੀ ਗਏ ਸੁジャਖਾ ਗੁਰਮੁਖ ਨੂੰ ਕਿਹਾ ਹੈ ਜੀ ਹੋਏ ਸੁジャਖਾ ਨਾਨਕਾ ਸੋ ਕਿਉਂ ਜੁੜ ਪਾਇ ਆਤਮ ਕਰ ਸੀ ਇਹ ਜਿਹੜਾ ਸੁジャਖਾ ਹੈ ਠੀਕ ਹੈ ਜੀ ਅੰਦੇ ਇਹਨਾਂ ਆਖੀਆਂ ਨ ਜਿਨ ਮੁਖੀ ਨਾਨਕਾ ਤਸਮੁ ਪੁੱਛੇ ਜਾਂਦੇ ਇਹ ਤੁਸੀਂ ਲੈ ਲਿਓ ਜਿਹਨੂੰ ਸੰਸਾਰੀ ਭਾਸ਼ਾ ਜਿਹਨੂੰ ਤੁਸੀਂ ਅੱਲਾ ਕਹਿੰਦੇ ਹੋ ਸਾਡਾ ਇਹਨਾਂ ਨੇ ਤਾਂ ਰਾਣੀ ਮੱਥੇ ਦੇ ਉੱਤੇ ਮੂੰਹ ਦੇ ਉੱਤੇ ਉਹ ਤੁਸੀਂ ਕਹੋਂਗੇ ਇਹਨੂੰ ਨਾਖਿਆ ਉਹ ਨਾ ਹੈ ਸਾਡਾ ਨਾ ਉਹ ਆਏ ਜਿਹਨੂੰ ਸੱਚ ਦਾ ਗਿਆਨ ਨਹੀਂ ਹੈ ਅੰਦਰ ਸਈ ਧਰਮਾਂ ਦੇ ਵਿੱਚ ਇੰਨੇ ਧਰਮ ਬੜੇ ਨੇ ਸੱਚ ਕੀ ਹੈ ਠੀਕ ਰਾਈਟ ਧਰਮ ਕਿਹੜਾ ਰੋਂਗ ਕਿਹੜਾ ਰਾਈਟ ਆ ਰੋਂਗ ਵੀ ਜਿਹਨੂੰ ਪਛਾਣਨੀ ਹੈ ਉਹਨੇ ਦੇ ਸਰੋ ਜੀ ਮਹੱਲਾ ਦੂਜਾ ਸਾਹਿਮ ਅੰਦਾਜੋ ਕੀਆ ਕਰੇ ਸੁ ਜਾਖਾ ਹੋਏ ਇਹਾ ਜਾਣੈ ਇਹੋ ਵਰਤੈ ਜੇ ਕੋਈ ਅੰਦਾਜ਼ਾ ਹੈ ਵੀ ਇੰਨਾਂ ਆਖਾ ਕੀਤਾ ਜੇ ਕੋਈ ਹੋਰ ਕੋ ਗਿਆਨ ਦੀ ਗੱਲ ਅੰਦਰ ਲਾਈਸੈਂਸ ਆਖਾ ਕਰਦਾ ਅੰਦਰ ਲੱਖ ਖੁੱਲਦੀ ਹੈ ਅੰਦਰਲੀ ਅੱਖਿਆ ਖੁੱਲਦੀ ਹੈ ਜੈਸਾ ਅੱਖਾਂ ਹੁੰਦਾ ਅੰਦਰੋਂ ਸੋਝੀ ਆਉਂਦੀ ਹੈ ਜਿਹੜੀ ਉਹ ਠੀਕ ਹੁੰਦੀ ਹੈ ਅੰਦਲੀ ਸੋਦੀ ਨਾ ਮਲਾ ਕੇ ਦੇਖਿਆ ਕਰੋ ਗੱਲ ਵੀ ਜਿਹੜੀ ਦੂਆ ਗੱਲ ਕਹਿ ਰਿਹਾ ਕੱਲ ਹੈ ਵੀ ਠੀਕ ਤੁਸੀਂ ਤਾਂ ਕਰਨ ਸੱਚ ਦੇ ਦੀ ਪਛਾਣ ਕਰੋ ਅੰਤਰਾਤਵਾਦੀ ਗੱਲ ਬੰਦੋ ਉਹਦੇ ਨਾਲ ਅੱਖਾ ਹੋਊਗਾ ਹਾਂਜੀ ਜੇਹਾਂ ਦੁਨੀਆਂ ਦੇ ਕੇ ਉਹ ਗਿਆਨ ਵਰਤ ਲੈਂਦਾ ਜੇ ਕਿ ਉਹ ਘਟ ਗਿਆ ਨੇ ਘਟ ਗਿਆ ਜਨਵਰ ਤੇ ਉਹ ਘਟ ਗਿਆ ਦੀ ਪੂਰਾ ਗੁਰ ਹੈ ਪੂਰਾ ਪੂਰਾ ਉਪਦੇਸ਼ ਹੁੰਦਾ ਪੂਰੇ ਗੁਰ ਦਾ ਉਪਦੇਸ਼ ਜਿਹੜੇ ਪੂਰੇ ਗੁਰ ਉਪਦੇਸ਼ ਗੁਰਬਾਣੀ ਉਹ ਕੀ ਕਹਿੰਦੀ ਹੈ ਪਾਰ ਬ੍ਰਹਮ ਨੇਕਟ ਕਰ ਦੇਖ ਪਾਰ ਬ੍ਰਹਮ ਨੂੰ ਆਪਣੇ ਅੰਦਰੋਂ ਨੇਕਟ ਉਹਵੇਂ ਨੀ ਪਾਰ ਦੂਰ ਆ ਕਿਤੇ ਵਿੱਚ ਦੇਸ ਦੇ ਵਿੱਚ ਗੋਦੀ ਗੂੰਜ ਵੀ ਵੱਢੀ ਪੈਂਦੀ ਏ ਉਹ ਹੈ ਹੀ ਗੱਲਾਂ ਬਾਤ ਕਰਨੇ ਅੰਦੇ ਨੇ ਜਿਹੜੇ ਉਹਨਾਂ ਨੇ ਆਪੇ ਵਰਤੋ ਜਾਣ ਨਾਨਕ ਗਾਹ ਕਿਉਂ ਲਈ ਸਕੇ ਨਾ ਵਸਤ ਪਛਾਨੋ ਜਦ ਰਚੀ ਵਸਤ ਹੈ ਜਦ ਵਰਤੇ ਨਹੀਂ ਰਹੀ ਹੈ ਸੰਸਾਰ ਚ ਸੱਚਾ ਗਿਆਨ ਨਹੀਂ ਤਾਂ ਕੋਈ ਪਛਾਣ ਕਰੇ ਸੱਚੀ ਜਾਂ ਝੂਠੀ ਸੱਚਾ ਤੇ ਝੂਠ ਦੀ ਪਛਾਣ ਆਣਾ ਉਹਦੇ ਹੀ ਹੋ ਸਕਦੀ ਹੈ ਜੇ ਸੰਸਾਰ 'ਚ ਕੋਈ ਸੱਚਾ ਝੂਠ ਦੀ ਪਛਾਣ ਕਰਾਉਣ ਵਾਲਾ ਹੋਵੇ ਵਰਤਦੀ ਹੋਵੇ ਸੱਚ ਦਾ ਵਰਤਾਰਾ ਵਰਤਦਾ ਹੋਵੇ ਸੱਚ ਗਿਆਨ ਕੋਈ ਕਰਾਉਂਦਾ ਹੋਵੇ ਆ ਸਕਦੀ ਆ ਪਰਮੇਸ਼ਰ ਆਪੇ ਦੇ ਕਿਵੇਂ ਬਈ ਸਕੇ ਨਾ ਗਿਆਨ ਨਹੀਂ ਹੈ ਬਗਾਰ ਕਿਸੇ ਦੇ ਦੱਸੇ ਤੇ ਸੋਝੀ ਤੋਂ ਨਹੀਂ ਪਛਾਣ ਸਕਦਾ ਕੋਈ ਵੀ ਸੱਚ ਨੂੰ ਝੂਠ ਨੂੰ ਇਸ ਕਰਕੇ ਤਾਂ ਸਾਰੇ ਝੂਠ ਦੇੰਦਿਆਂ ਦੀ ਚੱਲੀ ਜਾਂਦੀ ਹੈ ਕੋਈ ਸਮੇਂ-ਸਮੇਂ ਸਰ ਭਗਤ ਪੈਦਾ ਕੀਤੇ ਜਾਂਦੇ ਨੇ ਪਰਮੇਸ਼ਰ ਵੱਲੋਂ ਉਹ ਸੱਚਾ ਝੂਠ ਦਾ ਨੰਨਾ ਕਰਕੇ ਦੱਸਦੇ ਨੇ ਤਾਂ ਦੁਨੀਆਂ ਨੂੰ ਪਤਾ ਲੱਗਦਾ ਨਹੀਂ ਇਹਦਾ ਝੂਠ ਚੱਲਦਾ ਝੂਠੇ ਸਿੱਕੇ ਚੱਲਦੇ ਰਹਿੰਦੇ ਨੇ ਪਛਾਣੇ ਨਹੀਂ ਕਿਸੇ ਨੂੰ ਹਾਂਜੀ ਸਾਰੇ ਪੌੜੀ ਵਿੱਚ ਤਿੰਨ ਸ਼ੁਰੂ ਤਾਂ ਨਹੀਂ ਪ੍ਰੇਮ ਹਲਦੇ ਨੇ ਤੀਸਰਾ ਸਲੂਸ ਹੈਗਾ ਹਣ ਮਹੱਲਾ ਦੂਜਾ ਸੋ ਕਿਉਂ ਅੰਦਾ ਆਖੀਏ ਜੇ ਹੁਕਮ ਅੰਦਾ ਹੋਏ ਨਾਨਕ ਹੁਕਮੋਂ ਨਾ 부ਝੇਈ ਅੰਦਾ ਕਹੀਏ ਸੋ ਉਹ ਕਹਿੰਦੇ ਜਿਹੜਾ ਹੁਕਮ ਨਾਲ ਇਹਨਾਂ ਹੋਇਆ ਨੂੰ ਜੱਮਦੇ ਨੂੰ ਅੱਖਾਂ ਮਿਲੀਆਂ ਨਹੀਂ ਜਾਂ ਮਿਲੀਆਂ ਨੇ ਰਹੀਆਂ ਨਾਲ ਉਹਨੂੰ ਕਹੀਏ ਹੁਕਮ ਨੇ ਕੀਤਾ ਹੋਇਆ ਅੰਦਾ ਹੋ ਆਈ ਨੇ ਜਿਹੜਾ ਹੁਕਮ ਨੂੰ ਭੁਜਦਾ ਨਹੀਂ ਆਣਾ ਹੋਇਆ ਜਿਹੜਾ ਹੁਕਮ ਨਾਲ ਨਾ ਹੋਇਆ ਜਿਹੜਾ ਕਹਿੰਦਾ ਭਾਈ ਰੱਬ ਆ ਪਰ ਜਾਣਦੀਆਂ ਨਹੀਂ ਹੁਣ ਕੀ ਵਸਦੀ ਗੱਲ ਹੈ ਨਹੀਂ ਉਹ ਅੰਨਾ ਨਹੀਂ ਹੈ ਅੰਨਾ ਉਹ ਜਿਹੜਾ ਹੁਕਮ ਨਹੀਂ ਬੀਤਦਾ ਜਿਹਨੂੰ ਚਾਹੇ ਉਹਦੇ ਖਾਂ ਦੋ ਹੈ ਪੂਰੀਆਂ ਜਿਹੜਾ ਪੂਰੀ ਹੈ ਉਹ ਰਹਿਣ ਕਾ ਵੀ ਜਿਆਦਾ ਨਿਕਾ ਤੇਜ਼ ਕਰਨਦੀ ਪਰ ਜਿਹਨੇ ਹੁਕਮ ਨਹੀਂ ਭੁਜਿਆ ਹਾਂਜੀ ਅੰਦਰ ਸਬ ਦੇ ਸੰਤਰ ਦੇ ਆਪੇ ਤਾੜੀ ਲਾਈਨ ਸਬ ਮਹਿ ਪਰਵੇਸ਼ਾ ਜਿਹੜੀ ਕਾਇਆ ਹੈ ਸ਼ਰੀਰ ਹੈ ਉਹਦੇ ਅੰਦਰ ਮਹਿਲ ਗੜ ਹੈ ਉਹ ਮੰਦੰਦਰ ਹੈ ਜਿਹਨੂੰ ਕਹਿੰਦੇ ਤਾੜੀ ਲਾਈ ਬੈਠੇ ਜਾਗਰਤ ਅਵਸਥਾ ਚ ਬੈਠਾ ਸੁੱਤਾ ਹੋਇਆ ਨਹੀਂ ਤਾੜੀ ਲਾਈ ਹੁੰਦੀ ਹੈ ਤਾੜੀ ਜਾਗਰਤ ਅਵਸਥਾ ਵਿੱਚ ਹੁੰਦੀ ਹੈ ਤਾੜੀ ਕੀ ਹੈ ਸਾ ਆ ਰਿਹਾ ਲਗਾਤਾਰ ਠੀਕ ਆ ਰਿਹਾ ਹੈ ਚਾਹੀਦਾ ਪੰਪਿੰਗ ਕਰ ਰਿਹਾ ਸ਼ਰੀਰ ਹਾਰਟ ਉਹਦੇ ਤੇ ਧਿਆਨ ਹੈ ਪੂਰਾ ਉਹ ਤਾੜੀ ਹੈ ਕਹਿੰਦੇ ਨੇ ਕੋਈ ਨਾ ਹੋਰ ਕੋਈ ਨਹੀਂ ਹੈ ਕਿਸੇ ਚੀਜ਼ ਵੱਲ ਧਿਆਨ ਹੈ ਉਹ ਡਿਊਟੀ ਹੈ ਜੀ ਜੀ ਕਾਇਆ ਅੰਦਰੀ ਨਹੀਂ ਕਿਹਾ ਸਰੀਰ ਦੇ ਅੰਦਰ ਜਿਹੜੀ ਤਾੜੀ ਲਾਈ ਹੋਈ ਹੈ ਦੇਖ ਰਹੇ ਸਰੀਰ ਕੀ ਹੈ ਅੰਦਰਲਾ ਸਰੀਰ ਕੀ ਹੈ ਆਕਾਸ਼ ਹੈ ਛੜਾ ਇਹਦੇ ਅੰਦਰ ਉਹਦੇ ਨਾਲ ਜੁੜਿਆ ਹੋਇਆ ਸਰੀਰ ਵਿੱਚ ਆਕਾਸ਼ ਨਾਲ ਜੁੜਿਆ ਹੋਇਆ ਤੇ ਤੇ ਚਲੇ ਜਾਓ ਸਾਰਿਆਂ ਦੇ ਵਿੱਚ ਜਾਓ ਸਾਰਿਆਂ ਦੇ ਅੰਦਰ ਹੈਗਾ ਆਪੇ ਤਾੜੀ ਲਾਈਆਂ ਸਭ ਮੈਂ ਪ੍ਰਵੇਸ਼ਾ ਹਰੇਕ ਵੀਜੇ ਦਾ ਪ੍ਰਵੇਸ਼ ਆਏਗਾ ਦੇ ਵਿੱਚ ਪ੍ਰਵੇਸ਼ ਆਪੇ ਸ੍ਰਿਸ਼ਟ ਸਾਜੀ ਆਪ ਗੁਫਤ ਰਖੇ ਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀ ਇਸ ਨੇ ਸ੍ਰਿਸ਼ਟ ਪੈਦਾ ਕੀਤੀ ਆ ਸਾਜ ਕੇ ਅੰ내 ਆਪਣਾ ਆਪਾ ਵੀ ਵਿੱਚ ਰੱਖਿਆ ਆ ਆਪ ਵਿੱਚ ਹੀ ਪ੍ਰਵੇਸ਼ ਕੀਤਾ ਹੋਇਆ ਵਿੱਚ ਆਪ ਹੀ ਹੈ ਸਰੀਰ ਸਾਜ ਕੇ ਦਾ ਰਵੇ ਨਹੀਂ ਛੱਡ ਕੇ ਕਿਤੇ ਚਲਾ ਗਿਆ ਆਪਣਾ ਪ੍ਰਵੇਸ਼ ਵਿੱਚ ਰੱਖਿਆ ਹੋਇਆ ਨਿਵਾਸ ਵਿੱਚੇ ਰੱਖਿਆ ਆ ਪਰਵੇਸ਼ਾ ਹਾਂਜੀ ਆਪੇ ਸ੍ਰਿਸ਼ਟ ਸਾਜੀਆਂ ਤੋਂ ਕੀ ਪਰ ਬਣਦਾ ਸ੍ਰਿਸ਼ਟ ਪਰਮੇਸ਼ਰ ਨੇ ਸਾਜੀ ਹੈ ਗੱਲ ਹੈ ਪਰਮੇਸ਼ਰ ਨੇ ਸ੍ਰਿਸ਼ਟ ਸਾਜੀ ਜ਼ਰੂਰ ਹੈ ਉਹਦੇ ਤਾਂ ਮਾਇਆ ਦੁਹੀ ਸਾਜੀ ਆ ਜਿਹੜਾ ਸਰੀਰ ਹੈ ਨਾ ਸਰੀਰ ਨੇ ਆਪਣਾ ਪੇ ਸਾਜੀ ਹੈ ਸਾਬਨੇ ਆਪਣਾ ਆਪਣਾ ਸਰੀਰ ਆਪੇ ਸਾਜਿਆ ਇਹ ਸਰੀਰ ਵਾਸਤੇ ਜਿਹੜੀਆਂ ਲੋੜਾਂ ਨੇ ਮਾਇਆ ਉਹ ਪਰਵੇਸ਼ ਨੇ ਸਾਜੀ ਜਿਵੇਂ ਜੂਆ ਖੋਟ ਪੁੱਟਦਾ ਆਪਣੇ ਵਾਸਤੇ ਖੋਟਦਾ ਜਿਹੜੀ ਆਲ ਬਣਾਉਂਦੀ ਆਪਣੇ ਵਾਸਤੇ ਬਣਾਉਂਦੀ ਐ ਡੱਕੇ ਨਹੀਂ ਹੁੰਨੇ ਬਣਾਏ ਭਾਵੇਂ ਆਲ ਨਾਲ ਬਣਾਇਆ ਜਿਹੜੀ ਜੋਤ ਐ ਹਾਂ ਹਾਂ ਇਹਨਾਂ ਗਾੜ ਉਸ ਗੜਵੇਂ ਪਾਵਾ ਕਰਨ ਜਿਹਨੇ ਮਿਲਿਆ ਉਹ ਜੀ ਤੇ ਬੱਚੇ ਐ ਜਿਹਨੇ ਸ਼ਰੀਰ ਬਣਾਇਆ ਤਾਂ ਬੱਚੇ ਐ ਸ਼ਰੀਰ ਆਪੂ ਆਪ ਹੀ ਗੁਪਤ ਰੱਖੇ ਸਾ ਉਹਨੇ ਆਪਣਾ ਆਪ ਗੁਪਤ ਰੱਖਿਆ ਹੈ ਬੱਚਾ ਜੀ ਹਾਂ ਜੀ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਤੀ ਏਸਾ ਗੁਰਸੇਵਾ ਦੇ ਜਾਣਿਆ ਸੱਚ ਇਹ ਸੱਚ ਜਦੋਂ ਸੱਚ ਦਾ ਹਸਤਾ ਨਾ ਪਹਿਲਾਂ ਅੰਨੇ ਦੀ ਗੱਲ ਚਲੀ ਖਸਮੋ ਦਾ ਨੇ ਸਿੱਖ ਪੈਦਾ ਕੀਤੀ ਤੀ ਸੱਚ ਦੂਸਰੂਪ ਸੀ ਉਹ ਵਿਚਈ ਸੀ ਵਿਚੋ ਹੀ ਮਿਲ ਵੀ ਗਿਆ ਇਹ ਤਾਂ ਹੈ ਧਰਮ ਸਹੀ ਇਹ ਤਾਂ ਰਾਹ ਦੱਸਿਆ ਹੋਇਆ ਸਿਆਣਿਆਂ ਦਾ ਗਿਆਨੀਆਂ ਦਾ ਉਹ ਜਿਹੜੇ ਦੂਜੇ ਧਰਮ ਮਾਰਗ ਦੇ ਉਹ ਦੱਸੇ ਦੇਣੇ ਆਂਦੇ ਆ ਗੁਰਸੇਵਾ ਤੇ ਜਾਣਿਆ ਗੁਰਸੇਵਾ ਦਾ ਹੈ ਵਿਚਾਰ ਜੀ ਆਹ ਸ਼ਾਬਦ ਵਿਚਾਰ ਹੈ ਗੁਰਸੇਵਾ ਜਿਨ੍ਹਾਂ ਨੂੰ ਆ ਸੱਚ ਇੱਥੇ ਆਂਕਲ ਵਾਲਾ ਸੱਚ ਪ੍ਰਗਟ ਹੀ ਅੰਦਰੋਂ ਫੇ ਪ੍ਰਗਟ ਹੋ ਗਿਆ ਜੀ ਹਾਂ ਸੱਚ ਪ੍ਰਗਟ ਹੋ ਗਿਆ ਇਹ ਸੱਚ ਹੁਕਮ ਹੈ ਜੀ ਇਹੀ ਸੱਚ ਹੁਕਮ ਕਹਿੰਨੇ ਹਾਂ ਜੀ ਹਾਂ ਜੀ ਇਹ ਸੱਚੇ ਖਸਮ ਹੈ ਜੀ ਹਾਂ ਠਾਕੀ ਖਸਮੇ ਸਾਰਿਆਂ ਦਾ ਸਕਾ ਚਲਣਾ ਕਰਾ ਲਮ ਠੀਕ ਹੈ ਸਭ ਕੁਝ ਸੱਚੋ ਸੱਚ ਹੈ ਗੁਰਸੋਜੀ ਕਾਈ ਸਭ ਸੱਚੋ ਸੱਚ ਹੈ ਸੱਚ ਅਸਲ ਵਿੱਚ ਤਾਂ ਸੱਚ ਹੋਇਆ ਤਾਂ ਸਭ ਕੁਝ ਸੱਚੋ ਸੱਚ ਹੈ ਗੁਰਸੋਜੀ ਕਾਈ ਗੁਰਸੋਜੀ ਭਾਈ ਇਹ ਨਾਲ ਬੰਦਾ ਨਾਲ ਹਾਂਜੀ ਮੈਂ ਸੱਚੀ ਕਾ ਹਾਂਜੀ ਹਾਂਜੀ ठीक है सब के सच्चे सच्चे पर आपकी जो सृष्टि है जो भी दरतारा है सब सच तो ही चलया है पहला सच्चे दा सच्चे ने बना पया वो इस तरह गलना बना से बना ने चल होए एदा ही होया ठीक है इस गल दी सोची गुरु ने पाई है ठीक है जी एथे 16वीं पौड़ी दी स्वाक्ति है